ਵੱਵੇ ਵਾਰੀ ਆਈਆ ਊੜੇ ਵਾਸਦੇਓ ਤੁਦ ਵਿਸਰਿਆ ਮਾਵਾ ਜਿਹੜਾ ਹੈ ਉਹਦੇ ਨਾਲ ਕਹਿੰਦੇ ਨੇ ਵਾਰੀ ਐ ਤੇਰੀ ਹੁਣ ਇਹ ਗੋਬਿੰਦ ਬਨਾਲਕੀ ਇਹ ਤੇਰੀ ਵਰੀਆ ਆ ਜਿਹੜਾ ਬਦੁੱਖਾ ਚਾਲੂ ਹੈ ਗੋਬਿੰਦ ਬਨਾਲਕੀ ਵਰੀਆ ਐ ਵਾਰੀ ਆਈਆ ਤੇਣੀ ਫਿਰ ਪਤਾ ਨਹੀਂ ਵਾਰੀ ਕਾਦਾ ਹੁਣ ਜੇ ਐਦ ਕੀ ਗਿਆ ਕੜਗੀ ਜੇ ਤਦ ਕਰੇ ਮੈਨੂੰ ਕੀ ਕਦ ਨਾਨਕ ਆਵਾ ਬਾਰੀ ਫਿਰ ਪਤਾ ਨਹੀਂ ਬਾਰੀ ਕਦ ਆਊਗੀ ਆ ਬਾਰੀ ਸਾਹਮਣੇ ਜੇ ਸਾਹਮਣੇ ਦੀ ਹੈ ਇਹ ਆਈ ਹੈ ਪਾਣੀ ਨਾਲ ਤਰਿਆ ਜਾ ਸਕਦਾ ਹੈ ਉਨੁੱਖਾ ਦੇ ਵਿੱਚ ਗੁਰਬਾਣੀ ਵੀ ਸਾਨੂੰ ਮਿਲ ਗਈ ਹੈ ਜਦ ਵੀ ਐਸੀ ਜਗ੍ਹਾ ਹੋ ਗਿਆ ਜਿੱਥੇ ਗੁਰਬਾਣੀ ਸਾਨੂੰ ਮਿਲ ਗਈ ਹੈ ਸਮਝ ਵੀ ਮਿਲ ਗਈ ਹੈ ਜੇ ਹੁਣ ਵੀ ਨਹੀਂ ਅਸੀਂ ਕਰ ਤੇਰ ਇਹ ਦੋ ਘੜੇ ਕਰਬ ਦੀ ਹੋ ਸਕਦੇ ਹੋਰ ਕਦੇ ਵੀ ਬੰਦਾ ভারী ਆਇਆ ਗੂੜੇ ਬਾਸਦੇਵ ਤੁਦ ਵਿਸਰਿਆ ਪਰਦਰ ਵਾਸਿਆ ਤਾਂ ਵਿਸਰਿਆ ਹੈ ਵਾਸਦੇ ਕੌਣ ਨੇ ਜਿਹਨੇ ਤੈਨੂੰ ਦਿੱ ਘਰ ਤੇ ਨਿਵਾਸ ਦੇਣਾ ਸੱਚਖੰਡ ਤੇ ਨਿਵਾਸ ਦੇਣਾ ਜਿਹੜਾ ਫਿਰਦੇ ਚ ਬੈਠਾ ਉੱਧਰ ਗੁਰਦੇਵ ਬਾਗਾ ਗੁਰਦੇਵ ਪ੍ਰਤਾਪਵਾਸ ਦੇਗਾ ਉਹਦੇ ਨੂੰ ਜੁੜ ਜਾ ਉਹਦੇ ਦਵਾਲ ਦੇ ਨੇ ਸੱਚਖੰਡ ਚ ਉਹ ਆਪ ਵੀ ਸੱਚਖੰਡ ਚ ਰਹਿੰਦਾ ਮਾਇਆ ਜੀ ਹੁੰਦਾ ਉਹ ਉਹ ਵਿਸਰਿਆ ਹੋਇਆ ਵਿਸਰੀ ਹੋਈ ਹੈ ਆਪਣਾ ਰੂਹ ਵਿਸਰਿਆ ਹੋਇਆ ਬਾਹ ਦੇਵਤਾ ਤੁਦ ਵਿਸਰਿਆ ਇਹੇ ਵੇਲਾ ਨ ਲਹਸ ਹੈ ਮੂੜੇ ਫਿੱਪੂ ਜਮਕੇ ਵਸ ਪਿਆ ਆਦੇ ਵੇੜਾ ਫੇਰ ਨਹੀਂ ਹੱਟ ਸਕਦਾ ਫਿਰ ਤਾਂ ਜੰਬ ਦੇ ਬਾਸ ਤਾਂ ਜਦ ਕੀ ਦੇ ਪਰਬ ਦੇ ਹਲਡੇ ਜਬਦ ਹੋ ਜਾਣਾ ਫੁੱਟ ਸਕਦਾ ਜੇ ਤੋੜ ਸਕਦਾ ਤੂੰ ਪਰਬ ਦਾ ਨਾਸ ਕਰ ਸਕਦਾ ਫਿਰ ਪਰਬ ਚਲਦੇ ਫਿਰ ਬੰਦ ਹੋ ਜਾਣਾ ਫਿਰ ਕੋਈ ਇਲਾਜ ਨਹੀਂ ਤੇਰੇ ਕੋਲ ਸਰੀਰ ਤੋਂ ਬਾਅਦ ਕੋਈ ਇਲਾਜ ਨਹੀਂ ਹਾਂਜੀ ਹਾਂਜੀ ਇਹ ਵੇਲਾ ਮੈਂ ਲਹਿਸਾ ਮੂੜੇ ਫਿਰ ਤੂੰ ਜੰਮ ਕੇ ਵੱਸ ਪਿਆ ਫਿਰ ਵੀ ਇਹ ਬੇੜਾ ਬਿਲਣਾ ਜੱਬ ਦੇ ਵੱਸ ਪੈ ਜਾਂਦੇ ਫਿਰ ਤਸਰੇ ਜਿਨਾ ਚਿਰ ਜੀਵਨ ਚੱਲਦਾ ਉਹ ਵਿਚਰ ਬੇੜਾ ਹੈ ਜੇ ਕੋਈ ਸਾਂਭ ਲੂਗਾ ਜੰਮਾ ਹੋਦਾ ਜੰਮ ਜੰਮ ਦਾ ਕੀ ਅਰਥ ਹੈ ਜੰਮ ਦਾ ਪਰਮੂ ਦੱਸਿਆ ਤਾਂ ਹੈ ਪਰਮ ਦੇ ਜੋਤ ਹੈ ਜਿਹੜੀ ਪਰਮ ਦੇ ਵਿੱਚ ਇਹ ਢੇੜੇ ਢੇੜਾ ਜੋ ਉੱਤੋਂ ਕਾਬੂ ਰੱਖਦਾ ਜੀ ਜਿਹੜੀ ਜੋਤ ਉਹਦੀ ਲਾਈਟ ਹੁੰਦੀ ਆ ਅੜ ਨਾਲ ਜੇ ਤਾਂ ਹੁਣ ਪ੍ਰਕਾਸ਼ ਹੈ ਨਾ ਹੋ ਜਵੇ ਜਿੰਨਾ ਉੱਧਰ ਉਪਰ ਆਕਾਸ਼ ਹੈ ਫਿਰ ਤਾਂ ਜਦੋਂ ਚਲਾ ਗਿਆ ਬਾਹਰ ਜੇ ਪਰਬ ਰਹਿ ਗਿਆ ਤਾਂ ਉਹ ਦਾ ਪਰਬ ਤਾਂ ਬਣਿਆ ਰਹੂਗਾ ਫਿਰ ਪਤਾ ਨਹੀਂ ਕਦ ਟੁੱਟੂਗਾ ਜੀ ਪਰ ਜੇ ਕੁਛ ਟੁੱਟ ਜਵੇ ਪਰਬ کافی ਥੋੜਾ ਰਹਿ ਜਵੇ ਤਦ ਰੁੱਖਾ ਜਾਨ ਫੇਰ ਮਿਲ ਜੇ ਜਿਹੜਾ ਪ੍ਰੋਗਰੈਸ ਵੱਲ ਜਾਂਦਾ ਉਹ ਰੁੱਖਾ ਜਾਨ ਨੂੰ ਮਿਲ ਬਹੁਤ ਦੇਰ ਬਾਅਦ ਮਿਲਦਾ ਉਰੂਲੀ ਮਿਲਦਾ ਜਿਆਦਾ ਬੁੱਧ ਦਾ ਨਾਸੇ ਕਰ ਜਾਂਦਾ ਉਹ ਫਿਰ ਥੱਲੇ ਦੇ ਜੰਗਲ ਦੇ ਵਿੱਚ ਜਾਨਵਰਾਂ ਦੇ ਜੰਗਲ ਦੇ ਵਿੱਚ ਜਾ ਸਕਦਾ ਜੀ ਬੁੱਧ ਦਾ ਲੈਵਲ ਥੱਲੇ ਚੱਲੇ ਜਾਂਦਾ ਥੱਲੇ ਦੇ ਜਾਨਵਰਾਂ ਦੇ ਵਿੱਚ ਜਿੱਦਿ ਬੁੱਧ ਨਾਸ ਕਰ ਲੈਂਦਾ ਉਹਦਾ ਲੈਵਲ ਥੱਲੇ ਚੱਲੇ ਜਾਂਦਾ ਉਹਨੂੰ ਡਰਕਤਾ ਹੀ ਕਹਿੰਦੇ ਨੇ ਥੱਲੇ ਦੀ ਜੁਲੂ ਚਲਾ ਜਾਂਦਾ